ਸੱਸੇ ਸੰਜਮ ਗयो ਮੂੜੇ ਇੱਕ ਦਾਣ ਦੁੱਧ ਪਥਾਂਇ ਲਿਆ ਸੰਜਮ ਸੀ ਜਗਾ ਤੇਰੇ ਤੇ ਰਹੇ ਸੁੱਪੇ ਬੁੱਤ ਘੱਟ ਖਰਚ ਕਰ ਲ ਜਿਆਦਾ ਖੋੜ ਕਿਸੇ ਥੋੜੀ ਚੀਜ਼ ਤੋਂ ਜਿਆਦਾ ਲਾਹ ਲੈ ਜੀਵਨ ਦੇ ਥੋੜੇ ਸਮੇ ਤੋਂ ਜਿਆਦਾ ਲਾਹ ਲੈ ਇਸੇ ਜੀਵਨ ਜਿਹੜਾ एक ਮੁਠੀ ਚੜ੍ਹ ਨਾਲੇ ਸਾਰੇ ਦਿਹਾੜੀ ਕੱਢਦਾ ਸੀ ਗੁੱਡਾ ਉਹ ਕੀ ਕਰਦਾ ਸੀ ਇੱਕ ਟਾਲ ਦਾ ਬੂਚ ਪਾ ਕੇ ਬਹੁਤ देर ਤੱਕ ਚਪੀ ਜਾਂਦਾ ਉਹ ਦਾਣਾ ਬਹੁਤ देर तक ਪਾਣੀ ਬਣਾ ਕੇ ਅਦਾ ਕਰਦਾ ਸੀ ਉਹ ਸੱਜੂ ਸੀ ਕੱਟ ਸੁਬੇ ਚ ਕੱਟ ਪੈਸੇ ਗਰੀਬ ਕੀ ਕਰਦਾ ਸਸਤੀ ਚੀਜ਼ ਲੈ ਕੇ পেট ਭਰਦਾ ਸਬਜੀ ਨੂੰ ਉਹ ਸਸਤੀ ਨੂੰ ਸਜਮ ਹੈ ਜੇ ਅਮੀਰ ਉਹ ਥੋੜੀ ਚੀਜ਼ ਨੂੰ ਪੈਸੇ ਜ਼ਿਆਦਾ ਖਰਚ ਕਰੇ ਸਜਮ ਹੁੰਦਾ ਜੀਵਤੂ ਬੜੇ ਸੁਝਬ ਨਾਲ ਜੁੜਾ ਵੱਤ ਤੋਂ ਵੱਧ ਲਾਭ ਲੈਣ ਅਸੀਂ ਜੋ ਕੰਮ ਕਰਨਾ ਹੈ ਥੋੜੇ ਟਾਈਮ ਵਿੱਚ ਜ਼ਿਆਦਾ ਲਾਭ ਲੈਣਾ ਸਾਹ ਥੋੜੇ ਖਚੌਣ ਲਾਭ ਜਾਂਦਾ ਹੋ ਸਾਰੀ ਜ਼ਿੰਦਗੀ ਜਿੱਥੇ ਬੈਠੇ ਰਹਿੰਦੇ ਉੱਥੇ ਕਿਤੇ ਜਾ ਕੇ ਸਿੱਖੋ ਗੁਰੂ ਦੇ ਗੁਰੂ ਘਰ ਦੇ ਹਫਤਾ ਦਾ ਜਦੋਂ ਕੋਈ ਵੀ ਦਰ ਜਾਇਆ ਆ ਐਂਦਾ ਕੋਤੋਂ ਜ਼ਿਕਰ ਰ ਜਿੰਦਗੀ ਪਰ ਉਸੇ ਦੇ ਉੱਤੇ ਹੀ ਟੋੜ ਰ ਗੱਲਾਂ ਤਾਂ 10 ਵਾਰ 2-4 ਬਹੁਤ ਹੁੰਦੀਆਂ ਨੇ ਜੇ ਕਿਸੇ ਨੂੰ ਬੰਦੜੀ ਹੋੜ ਕੁਪੜਾਈ ਕਰਦੀਦਾ ਜਿਹਨੂੰ ਅੱਡੀ ਨਹੀਂ ਵੀ ਸਾਰੀ ਪੜ੍ਹਾਈ ਉਹ ਕਰ ਲਈ ਅਸੀਂ ਸਭ ਕੋ ਜਾਣ ਲਿਆ ਪੜਤ ਦੇ ਸਾਰੇ ਬੇਦਗਰੰਤ ਲੱਦੇ ਲਏ ਤੇ ਜਿਹਦਾ ਅਸਰੇ ਕੋਈ ਨਹੀਂ ਪੈ ਫਿਰ ਕੀ ਹੈ ਵਰਦਾਸ ਨੂੰ ਇੱਕ ਗੱਲੇ ਘੱਲ ਕਰਦੀ ਸੀ ਇੱਕੋ ਗੱਲੇ ਉਹ ਕਬੀਰ ਨੇ ਤਾਂ ਕਿਹਾ ਜੀ ਨਾ ਵਲਜੋ ਵਾਏ ਹੋਏ ਪਰ ਉਹਦਾਂ ਨਾ ਹੋਈ ਹੋਊ ਏਦਾਂ ਕਰ ਉਹਦਾਂ ਕਬੀਰ ਸਤਗੁਰੂ ਕਿਸੇ ਉਹਨੇ ਸੰਤ ਸਾਧ ਦੀ ਗੱਲ ਸੁਣ ਲਈ ਕੋਈ ਉਹ ਸੀ ਬਹੁਤ ਹਰ ਵਾਲਾ ਗੁਰਮਤਿ ਪੂਰਾ ਦਾ ਹੈ ਰੀਜੀ ਕੋਈ ਤਰਕ ਐਸਾ ਸੋਲ ਲਿਆ ਜਿਹੜਾ ਉਹਨੂੰ ਕਾਇਲ ਕਰ ਗਿਆ ਉਹਨੇ ਕਹਾ ਵੀ ਇਹ ਤਰਕ ਬੜੋ ਜਾ ਤਰਕ ਇਹ ਵੀ ਹੋ ਸਕਦਾ ਵੀ ਇੱਕ ਪਾਸੇ ਤਾਂ ਅਸੀਂ ਕਹਿੰਦੇ ਹਾਂ ਪਰਮੇਸ਼ਰ ਕਰਦਾ ਦੂਏ ਪਾਸੇ ਅਸੀਂ ਕਹਿੰਦੇ ਹਾਂ ਅਸੀਂ ਕਰਦੇ ਇਹ ਆਪਾਂ ਵਿਰੋਧੀ ਕਰਦਾ ਇੱਕ ਕੱਲਾ ਹੀ ਤਰਕ ਕਾਇਲ ਕਰਦਾ ਕੱਲਾ ਹੀ ਸਵਾਲ ਹੈ ਜੀ ਇਹ ਸਵਾਲ ਦੀ ਜਦੋਂ ਇਹ ਸਵਾਲ ਦਾ ਤੁਹਾਡੇ ਕੋਲ ਹਲ ਜਵਾਬ ਆ ਗਿਆ ਸਾਡੀ ਗੁਰੂਤ ਸਮਝ ਨਹੀਂ ਸਮਝਿਆ ਇੱਥੇ ਹੀ ਨੇ ਸਾਰੇ ਇੱਕ ਪਾਸੇ ਤਾਂ ਅਸੀਂ ਕਹਿੰਦੇ ਅਸੀਂ ਕੁਝ ਕਰਦੇ ਹਾਂ ਸਾਰੇ ਪੁੱਤ ਪਾਪ ਕਰਦੇ ਨੇ ਇੱਕ ਪਾਸੇ ਕਹਿੰਦੇ ਪਰਮੇਸ਼ਰ ਕਰਾਉਂਦਾ ਜੋ ਕਰਾਉਂਦਾ ਫਿਰ ਪੁੱਤ ਪਾਪ ਕਿਉਂ ਕਰਦਾ ਜਦ ਤੁਸੀਂ ਇਹ ਹੁਕਮ ਨੂੰ বুঝ ਲਿਆ ਇਹ ਹੁਕਮ ਹੈ ਇਹ ਹੁਕਮ ਜਿੱਦਣ ਇਹ ਜਿਹੜਾ ਮਸਲਾ ਹੱਲ ਹੋ ਗਿਆ ਸਵਾਲ ਹੱਲ ਹੋ ਗਿਆ ਸਾਡਾ ਇਹ ਪਰਪ ਚੱਕਿਆ ਗਿਆ ਇਹ ਗੱਲ ਦੀ ਸਮਝ ਆ ਗਈ ਉਹ ਪਰਪਦ ਬਾਕੀ ਦਾ ਖੋਜਣਾ ਹੀ ਹੈ ਫਿਰ ਸਸੇ ਸੰਜਮ ગયો ਮੂੜੇ ਸੰਜਮ ਚਲੇ ਗਿਆ ਤੇਰਾ ਸੱਜੇ ਬੁੜਈ ਰੱਖਿਆ ਏਕ ਦਾਣ ਤੂੰ ਇਹ ਜਿਹੜਾ ਤੈਨੂੰ ਦਾਲ ਲੈ ਲਿਆ ਨਾ ਕੋਠਾ ਇਹ ਲੈ ਕੋਠਾ ਇਹ ਨਾ ਮਤਲਬ ਨਹੀਂ ਹੈ ਜੋ ਤੈਨੂੰ ਬਿੜਿਆ ਗਿਆਨ ਉਹ ਇਹ ਖੋਪੜੀ ਚ ਲੈ ਰੱਖ ਲਿਆ ਜਿਨ੍ਹਾਂ ਦਾ ਖੋਪੜੀ ਚ ਗਿਆਨ ਆ ਮਿਸਯੂਜ਼ ਕਰਦੇ ਗਿਆਨ ਤੋਂ ਖੋਪੜੀ ਵਾਲਾ ਗਿਆਨ ਦਿਮਾਗ ਵਾਲਾ ਗਿਆਨ ਸ਼ੈਤਾਨ ਦੇ ਹੱਥ ਚ ਰਹਿੰਦਾ ਹਮੇਸ਼ਾ ਸ਼ੈਤਾਨ ਦਾ ਨਿਵਾਸ ਹੈ ਕਿੱਥੇ ਸਰ ਵਿੱਚ ਲਈ ਦੱਸੋ ਸ਼ੈਤਾਨ ਦਾ ਨਿਵਾਸ ਹੈ ਕਿੱਥੇ ਸ਼ੈਤਾਨ ਦਾ ਨਿਵਾਸ ਆਦਮੀ ਦੇ ਵਿੱਚ ਕਿੱਥੇ ਹੈ ਇਹਦਾ ਕੋਈ ਜਵਾਬ ਦੇਵੇ ਸ਼ੈਤਾਨ ਦਾ ਚਰਖਾ ਦਿਮਾਗ ਨੂੰ ਕਹਿੰਦੇ ਨੇ ਦਿਮਾਗ ਵਿੱਚ ਸ਼ੈਤਾਨ ਦਾ ਵਾਸ ਹੁੰਦਾ ਹਮੇਸ਼ਾ ਜਿਹਨੂੰ 10 ਬਜ਼ੁਰਗ ਕਹਿੰਦੇ ਨੇ ਅੱਧਾ ਸ਼ੈਤਾਨ ਹੈ ਅੱਧਾ ਇਨਸਾਨ ਹੈ ਜਿਹੜਾ ਇਹਦਾ ਅੱਧਾ ਇਨਸਾਨ ਵਾਲਾ ਪਾਸਾ ਹੈ ਅੱਧਾ ਇਨਸਾਨ ਦਾੜ ਹੋਈ ਜਾਂਦਾ ਅੱਧਾ ਸ਼ੈਤਾਨ ਹੈ ਸ਼ੈਤਾਨ ਦਾ ਨਿਵਾਸ ਦਿਮਾਗ 'ਚ ਇਨਸਾਨ ਦਾ ਨਿਵਾਸ ਸਿਰ 'ਚ ਹੈ ਦਿਲ 'ਚ ਇਸੇ ਕਰਕੇ ਕਹੇ ਬੰਦੇ ਖੋਜ ਦਿਲ ਹਰ ਰੋਜ਼ ਤੇਰੇ ਦਿਲ ਵਿੱਚ ਇਨਸਾਨ ਹੈ ਜਨ ਕਰਕੇ ਤੂੰ ਇਨਸਾਨ ਹੈ ਦਿਮਾਗ ਕਰਕੇ ਸ਼ੈਤਾਨ ਬਰਪੀਆਂ ਵਕੀਰ ਸਾਰੀਆਂ ਦਿਮਾਗ ਦੀ ਗਾੜ੍ਹ ਨੇ ਦੁਨੀਆਂ ਦੀਆਂ ਸਾਰੀਆਂ ਸ਼ਰਾਬਤਾਂ ਦਿਮਾਗ ਦੀ ਗਾੜ੍ਹ ਨੇ ਦੁਨੀਆਂ ਦਾ ਸਾਰੇ ਪਰਪੰਚ ਦਿਮਾਗ ਦੀ ਗਾੜ੍ਹ ਨੇ ਦੁਨੀਆਂ ਦੇ ਸਾਰੇ ਬੁਰੇ ਕਬ ਦਿਮਾਗ ਦੀ ਗਾੜ੍ਹ ਨੇ और ਨਹੀਂ ਕਾੜੇ ਪ੍ਰਧਾਨ ਹੈ ਸਰੋਗਲੀ ਕਮੇਟੀ ਚ ਸਾਰੀ ਵੀਰੇ ਕੋ ਸਬੂਤ ਹੈਗੇ ਜੀ चिट्ठी ਲਿਖਾਉਣਾ ਸੀ ਕਿ ਮੇਰੇ ਕੋਲ ਹੈ ਪਈ ਹੋਰ ਉਹ ਟਾਈਮ ਆ ਗਿਆ ਚਿੱਠੀ ਰੋਲਣਾ ਇਹੜਾ ਮੈਂ ਕਿਹਾ ਸੀ ਜਿਹੜਾ ਇਹਨੇ ਲਿਖਿਆ ਸੀ ਸਭ ਦਾ ਜਿਹੜੂ ਗਿਆ ਸਾਹਤ ਦੇ ਲੋਕ ਜਾਣਦੇ ਨੇ ਸ਼ਾਇਦ ਜੋ ਦਬਾਅ ਦੇ ਵਿੱਚ ਬੰਦ ਹੈ ਤਾਂ ਦੂਦਾਰੋ ਆਪ ਸ਼ੈਤਾਨ ਹੈ। ਫੰਕਰੀ ਬੰਦੇ, ਫਰਕ ਕਦੇ ਬੰਦੇ ਖੋਜ। ਬਿਲਕੁਲ। ਦਿਲ ਹਰ ਹੋ। ਦਿਲ ਹੋਇ। ਦਿਲ ਦੀ ਗੱਲ ਦੀ ਕਿਸੇ ਨੂੰ ਦੱਸਦਾ ਹੈ ਆਪਣੇ ਦੀ। ਸ਼ੈਤਾਨ ਇੱਥੋਂ ਬਣਾ ਬਣਾ ਕੇ ਚੀਜ਼ਦਾ। ਗਵਾਧੀਆਂ ਗੱਲਾਂ ਸਤਸਾਨਾ ਕਰਦਾ ਹੈ ਜਲਦੀ ਗੱਲ ਕੱਢ ਹੀ ਸਕਦਾ ਦਿਲ ਦੇ ਵਿੱਚ ਤਾਂ ਲਗਾਇਆ ਹੋਇਆ ਦਿਲ ਦੇ ਵਿੱਚ ਪਤਾ ਹੈ ਮੈਂ ਬੁਰਾ ਆ ਕੇ ਦਿਲ ਦੇ ਵਿੱਚ ਪਤਾ ਸਾਰੇ ਸੱਚ ਦਾ ਜਿਹੜਾ ਦਿਲ ਦੀ ਗੱਲ ਹੈ ਦੋ ਇਹਦੀ ਤੇ ਦਿਲ ਦੀ ਗੱਲ ਸਾਰੀ ਬਾਹਰ ਆ ਜਾਂਦੀ ਸਾਰੀ ਬਾਹਰ ਆ ਜਾਂਦੀ ਇਹ ਕਹਾਣੀਆਂ ਤੋਂ ਤਾਂ ਕਥਾ ਨਹੀਂ ਲਿਆ। ਆ ਜਿਹੜੇ ਫਿਰ ਉਟੀਕਾ ਲਾ ਕੇ ਪੁੱਛਦੇ ਨੇ ਪੁਰਖਾੜੇ ਦਿਲ ਦੀ ਗੱਲੇ ਪੁੱਛਦੇ ਨੇ। ਉਹ ਇਹ ਟੀਕਾ ਲਾ ਕੇ ਪੁੱਛਦੇ ਨੇ ਸੱਚ ਤਾਂ ਉਹ ਦਿਮਾਗ ਜਿਹੜਾ ਉਹਦਾ ਨਾ ਸੁਣਦਾ। ਸੁਣ ਕਰਦਾ ਜੀ। ਪੁੱਛਣਾ ਦਿਮਾਗ ਸ਼ੈਤਾਨੀ ਵਾਲੀ ਤਾਣਾ ਬਾਣਾ ਨਾ ਉਹ ਉਲਟੇ ਹੁੰਦੇ। ਉਹ ਸੁਣ ਕਰਕੇ ਦੇ ਸਾਰੇ ਉਕੋਦ ਤਾਂ ਇਹ ਨਸ਼ਾ ਜਾ ਕੇ ਆदमी ਸਾਰੇ ਗਲਤ ਹੁੰਦੇ ਸਨ ਫਿਰ ਜਦ ਮਾਰੇ ਸਨ ਉਹਨਾਂ ਸਾਈ ਪੁੱਤਰੀ ਜਿੱਤੇ ਲੋਕ ਨਸ਼ਾ ਤੋਂ ਖਲਾਫ ਨੇ ਸਾਰੇ ਸ਼ੈਤਾਨ ਦੇ ਫਰੇ ਸ਼ੈਤਾਨ ਦੇ ਸ਼ੈਤਾਨ ਆਪ ਜੇ ਖੁਦ ਵੀ ਦੇ ਹੁੰਨ आप क्या खाते पीते हो ना से परडे नशियां तो खिलाफ ने शैतान ने पट्ट तो नशे तो खिलाफ है सर का डर तो क्रांति कुछ चरित्र से साबित है शैतान सी कि मैं शैतान फड़ी गई कि वे काबू भी आ गया ओ। शिवजी शैतान नहीं है उनका रूप होला है ਉਹ ਨਸ਼ੇ ਕੰਦ। ਸੁੱਕਾ ਵੀਦਾ ਹੈ ਭੋਲੇ ਰਾਤਾ ਕਹਨ ਨੇ। ਔਲਾਦ ਵੀ ਛਕਾ ਨਹੀਂ ਹੁੰਦਾ। ਔਲਾਦ ਵੀ ਲੈ ਛਕਾਦੀ ਹੁੰਦਾ। ਪਰੜੇ ਚੈਤਾਨ। ਪਰੜਨ ਤਾਂ ਤੋਂ ਖਰਾਬ ਹੋਏ ਸੁੱਕੇ ਤੋਂ ਖਰਾਬ ਹੈ। ਪਰ ਕਿਹਾ ਪਰੜਨ ਤਾਂ ਜੇ ਬੁਲਿਆ ਖਰਾਬ। ਸੇ ਕਹਣਾ ਨਹੀਂ। ਕਿਆ ਇਹ ਜਿਹੜੇ ਸੰਤ ਨੇ ਚਿੱਟੇ ਕੱਪੜੇ ਨਾਲੇ ਇਹਦੋ ਦਾ ਸਿੱਧਰਦਾ ਰਹੀ ਹੈ ਹਾਸੇ ਫਕਤਾ ਨਹੀਂ ਹੈ ਇਹਦੇ ਖਲਾਅ ਮੇਰੇ ਕੋ ਗੁਰਬਾਣੀ ਦਾ ਸ਼ਰਫ ਕੱਢਣ ਦੀ ਵਿਧੀ ਰਹੀ ਹੋਈ ਹੈ ਗੁਰ ਕਰ ਕੇ ਧਿਆਨ ਕਰ ਬਹੁ ਆ ਉਹ ਕਰਤ ਜਹੇ ਬੇਰਾਗਰੀ ਹੈ ਉਹ ਗੁਰਮਤ ਰੂਪੀ ਮਦ ਗੁਰਮਤ ਸੱਚੀ ਸ਼ਰਾਬ ਗੁਰੂ ਘੜ ਵਹਰ ਸੱਚ ਵੀ ਸ਼ਰਾਬ ਹੈ ਪਰ ਇਹ ਗੋਲਡੀ ਪੈਦ ਤੇ ਮਾਂ ਤੇ ਪੀਣ ਵਾਲੀ ਹੈ ਸੱਚੀ ਸ਼ਰਾਬ ਗੁਰੂ ਘੜ ਵਹਰ ਗੋਲਡੀ ਪੈਦਾ ਗੋੜਾੜੀ શરીਰ ਦੇ ਪੀਂਦੇ ਹੋਈ ਜੋ ਕਿ શરીਰ ਦੇ ਪੀਂਦੇ ਵਾਲੀ ਸ਼ਰਾਬ ਹੈ ਸ਼ੀਰ ਦੇ ਵਿਚਰੇ ਵਾਲੀ ਸ਼ਰਾਬ ਦੀ ਗੱਲ ਕਰਦਾ ਹੈ ਨਾ ਅਠਵਾਂ ਦੇ ਗੱਲ ਕਰਦਾ ਸੱਚ ਦਾ ਆਪਣਾ ਰਸ ਹੈ ਝੂਠ ਦਾ ਆਪਣਾ ਰਸ ਹੈ ਇਸ ਪੂਪਤ ਸਵਦੇਵਸੀ ਕਾਰਕੇ ਝੁੱਠੇ ਕਰਤ ਦਿਵਾਜਾ ਤਗੜੇ ਨਾ ਹੇੜਾ ਅਦਵੀਯ ਨ ਬੋਧਾ ਜੇ ਰੂ ਸੱਚ ਦਾ ਰਹਿ ਹੋਵੇ ਰਾਜੇ ਨੂੰ ਬਦ ਰਹਿ ਹੋਵੇ ਉਹਦੀ ਹਮਤਾ ਰਾਜੇ ਨੂੰ ਤੇ ਇਹ ਗੱਲ ਕਹੇ। ਇਹ ਭੂਪਤ ਸਭ ਦਿਵਸ ਚਾਰ ਕੇ ਰਾਜੇ ਸੀ ਮੁਕਦਮ ਕੁੱਤੇ ਕੌਣ ਕਹੂਗਾ? ਪੂਰਾ ਨਹੀਂ ਆਲਾ ਕਹੂਗਾ ਜੀ ਤੁਸੀਂ ਸੱਜਣ ਰਖਾਇ। ਕਹਿ ਦੂਗਾ ਕੁੱਤੇ ਮੁਕਦਮ ਬੁਹਲ ਬਣਦਾ ਰਾਜੀ। ਬੋਟਲ ਕਰ ਦਿੰਦੇ। ਸੱਚ ਦੀ ਤਾਕਤ ਹੈਦੀ ਸੀ ਚੂ ਨਹੀਂ ਕੀਤੀ ਬੋਲ ਨਹੀਂ ਸਕਦੇ। ਇਹ ਕੀ ਬੋਲਣਗੇ ਵਿਚਾਰੇ ਇਹਨੇ ਕੀ ਬੋਲਣ ਗੱਦਰ ਬੋਲਦੇ ਉਹਦੇ ਨੇ ਬਿਰਗ ਬੋਲਦੇ ਨੇ ਫਾਇਦਾ ਹੁੰਦਾ ਰ ਬਿਰਗ ਪੇ ਤਾਂ ਆਏ ਗੁਰਦਾਸ ਜੀ ਵਾਰਾਂ ਨੂੰ ਬੋਲਦੇ ਨੇ ਜਿਹੜਾ ਕਹਿੰਦੇ ਸੀ ਬੁੱਖੇ ਫਿਰ ਅਸੀਂ ਤਾਂ ਕਹਿੰਦੇ ਉਹਨਾਂ ਨੂੰ ਨਾਮ ਨਹੀਂ ਪਰ ਇਹ ਤਾਂ ਉਹਨਾਂ ਨੂੰ ਬੋਲਦੇ ਨੇ ਸਿੱਖ ਬੁੱਖੇ ਫਿਰ ਗਾਵਲੀ ਬਿਰਗ ਫਾਇਦਾ ਹੁੰਦਾ ਨੇ ਪਾਇਦਾਂ ਨੂੰ ਰਾਹ ਨਿਵਲਦਾ ਇੱਕ ਦੂਏ ਚ ਲੱਗਦੇ ਹੁੰਦੇ ਨੇ ਸਾਈਂ ਪੁੱਤਰੀ ਜਜਮਾਨ ਕੀ ਸਾਹ ਤੇਰੀ ਏਦ ਧਾਨ ਖਾਦੇ ਤੇਰਾ ਜਨਮ ਗਿਆ ਸਾਈਂ ਪੁੱਤਰੀ ਜਜਮਾਨ ਕੀ ਸਾਹ ਤੇਰੀ ਜਿਹੜਾ ਤੂੰ ਫੇਰੇ ਕਰਾ ਕੇ ਲੈਣਾ ਪੈਸੇ ਸਾਡੇ ਗੁਰਦਾਰੇ ਵੀ ਤੁਸੀਂ ਤਾਂ ਕੱਟ ਏ ਜਿਹੜਾ ता ते ਧਾਨ ਖਾ ਲਿਆ ਤੇਰਾ ਦੀਦਪ੍ਰਸ਼ਟ ਹੋ ਗਿਆ ਆਪਣੀ ਪੁੱਤਰੀ ਦਾ ਧਾਨ ਖਾ ਲਿਆ ਉਹ ਚੇਲੇ ਦਾ ਪੁੱਤਰ ਹੁੰਦਾ ਏ ਜੇ ਤੇਰੀ ਪੁੱਤਰੀ ਨਹੀਂ ਤੇਰੀ ਤਾਂ ਪੁੱਤਰੀ ਹੈ ਅਗੇ ਤੇਰੇ ਚੇਲੇ ਦੀ ਪੁੱਤਰੀ ਇਹ ਧਾਨ ਖਾ ਦੇਦੇ ਕੀ ਹੋਇਆ ਤੇਰਾ ਜਨ ਹੋ ਗਿਆ ਤੇ ਸਾਡਾ ਕਿਹਦਾ ਵਜ੍ਹਾ ਹੈ ਜਨੂ ਕਿਹੜੇ ਰਾਗੀ ਦਾ ਜਨੂ ਬਚਿਆ ਇਹ ਜਵਾਬ ਦੇਣਾ ਪਊ ਹੋਣਾ ਇਹਨਾਂ ਨੂੰ ਜੇ ਤੁਸੀਂ ਇਹੀ ਕੰਮ ਕਰਨਾ ਸੀ ਮੈਂ ਸੀ ਹਿੰਦੂਏ ਜਗ੍ਹਾ ਸੀ ਜੇ ਇਹੀ ਕੰਮ ਕਰਨਾ ਸੀ ਤੁਸੀਂ ਵੀ ਸਿੱਖੋ ਕੇ ਫਿਰ ਤੁਹਾਡਾ ਨਾ ਹਿੰਦੂਏ ਜਗ੍ਹਾ ਸੀ ਉਹ ਫਿਰ ਫੇਰੇ ਕਰਾਉਣ ਲੱਗ ਜਾਣਾ ਚਾਹੀਦਾ ਸਿੱਖਾਂ ਨੂੰ ਨਸ਼ਾ ਤਿਆਰ ਛੱਡ ਦੇਣੇ ਕਹਿਈਦੇ ਨੇ ਸਿੱਖ ਤਾਂ ਨਾਨਕਾ ਨੂੰ ਜਾਣਾ ਉਹਦਾ ਜਾਣ ਸਿੱਧੂ ਇਹਨਾਂ ਨੂੰ ਕਹਿੰਦੇ ਨਸ਼ਾ ਨੂੰ ਦੂਰ ਦੇਓ ਗੋਲਕਾ ਤੇ ਹਸਾਬ ਨਾਲ ਗੋਲਕੀ ਚ ਪੈਸੇ ਪਾਉਣੇ ਅਫਰਾਦ ਸਿੱਖਾਂ ਨੂੰ ਲੋਟ ਤੋਂ ਡੇਗਣ ਇਹ ਗੋਲਕਾ ਦਾ ਪੈਸਾ ਗਲਤ ਤੋਂ ਡੇਗ ਰਿਹਾ ਇਹਨਾਂ ਨੂੰ ਜਿਮੇਵਾਰ ਕੋਲ ਨਾ ਪੈਸੇ ਪਾਉਣ ਵਾਲੇ ਜਿਮੇਵਾਰ ਨੇ ਅਸੀਂ ਉਹ ਅਪਰਾਧ ਦੇ ਜਿਮੇਵਾਰ ਐਲੋਕ ਦੇ ਪਿੱਛੇ ਪੈਸੇ ਪਾ ਰਹੇ ਆ ਗੁਰੂ ਸਾਡੇ ਨਾਲ ਬਿਲਕੁਲ ਰਾਜੀ ਨਹੀਂ ਹੈ ਪਰ ਸਾਡੇ ਕੋਲ ਵੀ ਖਰਾਬ ਦੀ ਕਮਾਈ ਆ ਅਸੀਂ ਕਿਹੜਾ ਦੱਸਾਂ ਉਹਦੀ ਕਰਦੇ ਸੀ ਚਿੱਤ ਜਿਆਦਾ ਲੋਕ ਪਾਉਂਦੇ ਨੇ ਜਿਆਦਾ ਬੇਈਮਦੀ ਦਾ ਪੈਸਾ ਲੋਕ ਉਹ ਦਫਾ ਹੋਣਾ ਜੇ ਬੇਈਮਾਨੀ ਦਾ ਚੰਦੇ ਕਦ ਕਿਤੇ ਚੰਗੇ ਥਾਂ ਲਾ ਦੋ ਗੁਰੂ ਦੇ ਖਿਲਾਫ ਕਿਉਂ ਲਾ ਹੋ ਗੁਰੂ ਦੇ ਨਾਲ ਵਰਤੋ ਰਿਹਾ ਕਰੇ ਤੇ ਪੈਸਾ ਗੁਰੂ ਦੇ ਖਿਲਾਫ ਵਰਤ ਹੋ ਰਿਹਾ ਹੈ ਦਰਗਾਹ ਜਬਰਦੀ ਰਿਹਾ ਸਾਰੇ ਸਿੱਖ ਜਿੰਨਾਂ ਕੋਲ ਦਾ ਪੈਸਾ ਗੁਰਦੁਆਰਾ ਦੇ ਦਰਗਾਹ 'ਚ ਮਾਫੀ ਮੰਗ ਲਈ ਇਹਨਾਂ ਨੂੰ ਪਾਤਸ਼ਾਹ ਦੇ ਕਾਕੇ ਫਾਹਾ ਪਹਿਣਾ ਤੇ ਫਾਹਾ ਇਹਨਾਂ ਦੇ ਗੱਲ 'ਚ ਵੀ ਪਹਿਣ ਚਟੜਿਆ ਤੇ ਚਾਟੜੇ ਉਹੀ ਨੇ ਜਿਹੜੇ ਗੋਲਕ ਭਰਦੇ ਜਦੋਂ ਦੀ. ਜਿਹੜੇ ਪਾਦੇ ਨੂੰ ਦੱਸ ਦਿੰਦੇ ਇਹ ਪਾਦੇ ਨੇ ਸਾਡੇ ਇਹਨਾਂ ਦੀ ਗੋਲਕ ਭਰਨ ਵਾਲੇ ਨੇ ਚਾਟੜੇ ਨੇ ਚਾਟੜਾ ਨੇ ਗਰਜ ਬਾਹ ਗੋ ਫੜਨਾ ਚਾੜੜੇ ਤੁਹਾਨੂੰ ਪ੍ਰਸ਼ਤ ਕਰਨ ਵਿੱਚ ਹਿੱਸੇਦਾਰ ਨੇ ਤਾਂ ਭੰੜ ਉਹ ਗਰੀਬ ਆਦਮੀ ਜਿਹੜਾ ਲੰਗਰ 'ਚ ਜਾਂਦੇ ਪ੍ਰਸ਼ਾਦਾ ਛਕਦਾ ਪੈਸਾ ਚੜਾ ਨਹੀਂ ਸਕਦਾ ਉਹਦਾ ਜੀਵਨ ਵੀ ਪ੍ਰਸ਼ਤੇ ਕਰਦੇ ਉਹ ਨੂੰ ਸੇਖਿਆ ਤੇ ਤੁਹਾਨੂੰ ਦਿਗਾ ਸਾਡੇ ਬੱਚਿਆਂ ਨੂੰ ਸਿਖਿਆ ਕਿੱਥੋਂ ਮਿਲਦੀ ਹੈ ਜਿਹੜੇ ਜਨਮ ਲੈਣਗੇ ਹੁਣ ਉਹ ਕੀ ਪੜਨਗੇ ਉਹੀ ਪੜਨਗੇ ਜੋ ਸਾਨੂੰ ਦੇਖਣਗੇ ਪੜਾਉਣਗੇ ਆਪਣੇ ਦੁਕਾਨ ਆਲੇ ਨਾ ਮੁਡੇ ਉਪਰ ਸਾਰਾ ਆਇਆ ਜਿਹਨੂੰ ਪਰबीर ਬੜੇ ਕੋਲ ਅਰੇ ਦੁਕਾਨ ਦੇ ਸੁਬਾਹ ਹੀ ਗਿਆ ਉਹਨੇ ਮੁੰਡੇ ਦਾ ਵਿਆਹ ਸੀ ਅਜੀ ਤਰਤਾਰ ਉਹਨਾਂ ਦਾ ਹੈ ਪਿੰਡ ਤਰਨਤਾਰਨ ਬੈਲੇ ਪੁੱਤਰ ਯੋਗਨ ਦਾ ਪਿੰਡ ਉਹਨਾਂ ਦੇ ਕੋਲ ਰਿਸ਼ਤੇਦਾਰ ਸੀ ਸ਼ਰਬੁਲੀ ਕਮੇਟੀ ਕਾ ਬੈਬਰ ਸੀ ਉਹ ਆ ਗਿਆ ਮੈਂ ਪਾਸੇ ਬੈਠਾ ਸੀ ਉਸ ਨੂੰ ਵਿਚਾਰਾ ਜਰੂਪੀਂਦੇ ਸੀ ਚਲੋ ਮੈਂ ਪਰੇ ਹੋ ਕੇ ਬੈ ਗਿਆ ਸੁਪਰ ਵੀਰ ਦਾ ਤਾਂ ਕੋਈ ਸ਼ਾਸੂਪ ਲੈਦਾ ਵਿੱਚ ਉਹ ਹੈਗਾ ਕਲੀਸ਼ ਹੈ ਚਰਨ ਤੇ ਗੋਰੀ ਮੈਂ ਆਪਣੀ ਕੁਬਜੋਰੀ ਦਸਾਂ ਲੱਗਿਆ ਜਿਹੜੀ ਕਿਸੇ ਨੇ ਗੱਲ ਕਹਿਣੀ ਆਪ ਕੋਈ ਕਹਿਣੀ ਆ ਬਿਲਕੁਲ ਕਿਸੇ ਨੂੰ ਗਣੀ ਰੌਣੀਆਂ ਆਵਾੜਾਓ ਜੇ ਸ੍ਰੀਚੰਦ ਦੇ ਜੱਟਾਂ ਰੱਖੇ ਨਹੀਂ ਸਿੱਖ ਬਣੇ ਕਾਰਕਰਾ ਸੁਹੁਰਾ ਚ ਸ੍ਰੀਚੰਦ ਦੀ ਸ੍ਰੀਚੰਦ ਆ ਜਾਂ। ਅਰੇ ਆਪਣਾ ਆਪਣਾ ਜ਼ਿੰਮੇਵਾਰ ਹੈ ਕੋਈ ਕਿਸੇ ਦਾ ਠੇਕੇਦਾਰ ਹੈ ਆਪਣਾ ਮਰਜ਼ਾ ਬੰਦਾ ਜੀ ਦੂਏ ਦਾ ਕੌਣ ਬੁਲਾ ਦੂ? ਆਪਣੇ ਬੁਲਾ ਲੋ ਨਹੀਂ ਬੁਧਾ ਰਿਹਾ। ਦੂਏ ਦਾ ਠੇਕਾ ਨਾ ਆਬ ਨਹੀਂ ਜਾਣਾ ਆ ਵੀ ਉੱਥੇ ਰਹਿ ਜਾਊਗਾ। ਤੇ ਕੀ ਹੋਣੀ ਤੇ ਤੇ ਤੇ ਕਰਿਆ ਸਾਡੀ ਜੇ ਬਗਾਰਾ ਇੱਥੇ ਉਹ ਵਾਕ ਵੀ ਇਹੋ ਜਿਹੀ ਸੀ ਉਹ ਤਾਂ ਡਬੇ ਡਬੇ ਸੀਗੇ। ਉਹ ਨਾ ਹੁੰਦਾ ਜੇ ਅਜਿਹੀ ਉਹਦੀ ਉਹ ਬੜਾਈ ਕਰਦੇ ਨੇ ਬਰਾਸੀ ਆਵੰਗੂ ਜਿਹਦੇ ਨਾਲ ਸੌਂਡ ਐ ਤੇ ਦੋ ਪੈਸੇ ਬਣ ਉਹਦੇ ਨਾਲ ਜਾਦਾ ਸੀ ਪ੍ਰਧਾਨ ਸੀ ਉਹ ਇਹਦਾ ਜਾਇਜ਼ਾ ਕਰੀ ਜਾਣੂ ਬੁੱਢੇ ਜਾਣੂ ਨੇ ਦਾ ਰੋ ਲੈ ਹੂੰ ਕੋਣ ਉਹ ਬਰਾਸੀ ਨੂੰ ਤਾਂ ਪੈਸੇ ਚਾਹੀਦੇ ਵਰੰਦੀਰ ਕੌਮਾ ਜੀ ਗੁੱਡਾ ਬਰਾਾਸਟੋਰ ਉਹ ਵੇ ਨੂੰ ਸੱਦ ਲਿਆ ਉਹ ਬੜੇ ਬੁੱਢੇ ਨੇ ਉਹਨਾਂ ਦੇ ਬੜੇ ਛੋਟੇ ਨਾਲ ਤੋਂ ਛੋਟੇ ਨਾਲ ਵਿਆਹ ਸੀ ਬਈ ਤੁਸੀਂ ਆ ਵੀ ਇੱਥੇ ਬੈਠੇ ਤੁਸੀਂ ਸਾਡੇ ਕੋਲ ਬੈਠਾ ਕੋਈ ਨਹੀਂ ਮੈਂ ਬੈਹ ਉਹਨੂੰ ਪਤਾ ਨਹੀਂ ਕਿ ਕੋਲ ਬੈਠਾ ਨੂੰ ਕੋਈ ਤਰ੍ਹਾਂ ਦੀ ਜਿਹਾ ਫੀਡਾ ਨਹੀਂ ਤਾਂ ਕੋਲ ਨੂੰ ਕੋਈ ਨਹੀਂ ਕੋਈ ਕੁਛ ਆਈ ਜਾਵੇ ਕੋਈ ਨਹੀਂ ਜਾਵੇ ਉਹ ਅਥਾ ਜੋਨੇ ਬੁਲਾਇਆ ਕਿ ਨਾ ਕਮੇਟੀ ਦਾ ਬਿਲਕੁਲ ਉਹ ਤਾਂ ਸਾ ਵੀ ਉਹ ਜਿਹੜੇ ਬੰਦੇ ਬੈਠੇ ਗਏ ਉਹਨੂੰ ਕਹਿੰਦਾ ਹੋਊਗਾ ਉਥੇ ਕੇ ਯੂਪੀਡੀਓ ਯੂਪੀ ਕੋਰ ਰੇ ਤੇ ਸਾਡੇ ਉਹ ਕਹਿੰਦਾ ਵੀ ਆਪਾਂ ਗੱਲ ਬਾਤ ਕਰੀਏ ਨਾ ਅਹ ਗੱਲਾਂ ਕਰਨ ਲੱਗਿਆ ਕੁਰਬਾਨੀ ਦੀ ਉਹ ਵੀ ਕੁਰਬਾਨੀ ਦੀ ਕਲਾਸ ਆਉਂਦੇ ਨੇ ਨਾਲ ਹੀ ਉਹ ਲਿਖਿਆ ਫਰਾਂ ਪਤਾ ਬੁੱਝ ਕੇ ਉੱਥੇ ਬਹਿ ਗਏ ਉਹ ਕਹਿੰਦਾ ਕਮੇਟੀ ਦਾ ਉਹ ਬੇਬਰ ਵੀ ਉਹ ਵੀ ਪੀਦਾ ਪੁੱਦਾ ਕੀ ਕੀ ਵੀ ਸਾਨੂੰ ਤਾਂ ਕੋਈ ਤਰਾ ਨਹੀਂ ਅਸੀਂ ਤਾਂ ਇਹ ਖਾਸੇ ਪੀੜ ਤੇ ਜਿਹੜਾ ਪੀਦਾ ਬੀਲ ਕਿ ਵਰਪਨ ਕਾਫਤਾ ਹੋਰ ਬਤੈਣੇ ਛੱਡਣ ਵਾਲੇ ਇਹ ਤਾਂ ਬਾਅਦ ਛੱਡ ਦੇਵੇ ਜਹੇ ਪਹਿਲਾਂ ਗੋੜੇ ਛੱਡ ਲਵੇ ਉਹ ਬੈਠੇ ਬੈਠੇ ਪਰਬੀਰ ਦਾ ਫੇਰ بار بار ਜੇ ਕਰਾਈ ਜਾਵੇ ਉਹ ਕਹਿੰਦਾ ਦਰਬਾਰ ਸਭ ਕਹਿੰਦਾ ਕਹਿੰਦਾ ਇਹਨਾਂ ਦਾ ਬੁੱਢਾ ਪਰਬੀਰ ਉਹ ਬੜਾ ਝਟਕਾ ਲੱਗਿਆ ਕਹਿੰਦਾ ਹੈ ਲੱਗਿਆ ਇਹਦਾ ਨਾ ਬੁੱਢਾ ਹੈ। ਪੂਰਾ ਸੈਤਵਾਂ ਕਰਨ ਕੀਤੀ। ਮੇਰੇ ਦੇ ਦੀ ਹੁਤੀ ਹੈ ਜਿਹੜੀ ਬੱਲੇ ਬੱਲੇ ਵੀ ਇਹਨਾਂ ਦਾ ਹੀ ਬੁੱਢਾ ਹੈ ਉਹਨੇ ਤਾਂ ਐਂ ਗੱਲ ਕੀਤੀ। ਉਹਨੂੰ ਝਟਕਾ ਐਂ ਲੱਗਿਆ ਵੀ ਇਹ ਕਲੀਨ ਜੇਵ ਹੈ ਇਹ ਦੇ ਰਿਕ। ਕਿਤੇ ਬੜਾ ਚੱਟ ਸ਼ੌਕ ਲੱਗਿਆ ਕਹਿੰਦਾ। ਕਹਿੰਦਾ ਕਿਉਂ? ਕਹਿੰਦਾ ਕਲੀਨ ਜੇਵ ਹੈ ਕੀ ਹੋ ਕੀ। ਮਾਇਸ ਤੇ ਮਾਇਸ ਕਸ਼ੌਕ ਦੀ ਗੱਲ। ਕਹਿੰਦਾ ਨਹੀਂ ਕਹਦਾ ਏ ਮੇਰੇ ਵਾ ਵੰਨ ਵਿੱਚ ਅਸ ਗੱਲ ਹੋ ਗਈ। ਉਹ ਆਇਆ ਚੱਲ ਛੱਡ ਪਰੇ ਕੀ ਲੈਣਾ। ਆਪਣੇ ਆਪਣੇ ਤਕਸੀਬ ਦੱਸੀ ਦੀ ਹੁੰਦੀ ਅਸੀਂ ਅਸੀਂ ਲੋਕਾਂ ਦੇ ਬਹੁਤੀ ਹੜਾਈ ਵੱਡੀ ਬਗੜ ਲਾਗੇ ਉਹ ਸਾਰੀ ਖਾਲੀ ਹੋ ਰਹੀ। ਵਿਚਾਰਾ ਵਜਾਵਾ ਹੀ ਹੋਇਆ ਹੜਾਈ ਵੱਡੀ ਬਗੜ ਲਈ ਇੱਕੋ ਸਿਆੜ ਆਇਆ ਤੇ ਝਪ ਗਿਆ। ਵਿਚਾਰਾ ਤਾਂ ਖਾਲੀ ਹੋ ਰਹਿ ਗਿਆ ਸਾਰੇ। ਉਹਨਾਂ ਵਾਹਿਆ ਹੋਇਆ ਮੰਨਿਆ। ਨਾ ਬਰਨ ਵਾਹਿਆ ਆਪਨੇ ਤੇ ਕੁਝ ਬਣਾਇਆ ਕਿਸੇ ਹੱਲ ਲਿਆ ਚਾਲ ਵਾਲੇ ਬਿਲਡ ਦੇ ਤੇ ਛੁਪ ਗਿਆ ਬਾਇਆ ਕੀ ਕੁਝ ਨਹੀਂ ਕੀਤਾ ਕੀ ਕੁਝ ਨਹੀਂ ਪਜਾ ਤਾਂ ਹੜਿਆਈ ਦੀ ਹੜਿਆਈ ਦੀ ਉਹ ਚਾਬੀਆਂ ਦੀ ਹੱਤ ਹੁੰਦੀ ਆ ਉਧਰ ਉਹ ਘੜੇ ਪੈ ਗਿਆ ਕਹਿੰਦਾ ਤੁਸੀਂ ਕਹਿੰਦੇ ਮੈਂ ਛੱਡਿਆ ਨਹੀਂ ਸੁੱਕਾ ਕਰੇ ਇਹ ਭਾਈ ਸਾਹਿਬ ਨੂੰ ਵੀ ਸਾਡੇ ਨੂੰ ਜਵਾਬ ਦੇ ਦੋ ਇਹਦੀ ਤਸੱਲੀ ਕਰਾ ਦਿਓ ਕਹਿੰਦਾ ਮੇਰੇ ਤਸੱਲੀ ਨਹੀਂ ਹੁੰਦੀ ਤੁਸੀਂ ਵਿਚ ਗਾਲਾਂ ਦਸੋ ਕੀ ਉਹ ਵੇ ਆਦਾਇ ਕਹੂਗਾ ਵੇ ਮੇਰੇ ਕਾਣੋਂ ਨਹੀਂ ਬੰਦਾ ਵੀ ਕੁਝ ਕਹੋਣਾ ਚਾਹੁੰਦਾ ਸੀ ਵਖਾ ਵਾਇਦਾ ਪਾਈ ਕਰੇ ਜਿਵੇਂ ਉਸਕੇ ਹੈ ਹੀ ਨਹੀਂ ਇਹ ਤੁਸੀਂ ਉਮਰ ਤੇ ਛੋਹ ਜਾਂ ਸਿੱਖ ਬਣੋ ਜਾਂ ਨਾ ਵੇਰਾਏ ਆਪਣਾ ਮਨ ਨਹੀਂ ਉਵੇਂ ਕਹਨੇ ਚਾਹਗਾ ਮੈਂ ਇਹ ਨੂੰ ਕਹਿਣਾ ਅਜੇ ਵੀ ਤੂੰ ਤਾਂ ਬਣ ਜਾ ਬਿਲਕੁਲ ਯਾਰ ਚਲ ਮੈਂ ਬਣ ਜੂ ਫਿਰ ਵੇ ਕਿਸੇ ਨੂੰ ਉਹ ਕਹੂਗਾ ਇਹ ਸਾਨੂੰ ਪੜਾਇਆ ਸਾਨੂੰ ਇਹ ਪੜਾਇਆ ਪਹਿਲਾਂ ਆਪ ਸਿੱਖ ਬਣਜੋ ਜਾਂ ਬਣਜੋਗੇ ਫਿਰ ਕਿਸੇ ਨੂੰ ਕਿਉਂ ਪਹਿਲਾਂ ਨਾ ਕਹੋ ਮੇਰੇ ਮਰਦ ਨੂੰ ਉਹਦੇ ਆ ਪਹਿਲਾਂ ਨਾ ਕਹੋ ਆਪ ਨਾ ਰਹਿ ਜੇ ਹੋਗੇ ਤੇ ਸਾਨੂੰ ਤਾਂ ਪੜ੍ਹਾਈ ਹੀ ਪੜ੍ਹਾਈ ਆਜਾ ਮੈਂ ਸਿੱਖ ਬਣਿਆਂ ਦੀ ਆਪ ਪੂਰਾ ਮੈਂ ਕਿਦਰ ਗਿਆ ਜਦੋਂ ਮੈਂ ਬਣ ਜੂ ਮੈਨੂੰ ਦੇਖ ਕੇ ਹੀ ਬਣ ਜਾਣਾ ਤੇ ਜੇ ਬੜਨਾ ਹੋ ਕਹਿਣ ਦੀ ਲੋੜ ਫਿਰ ਵੀ ਨਹੀਂ ਪੈਂਦੀ ਲੋਕ ਬਟਾਂਦਰ ਦੇ ਸੇਰੇ ਵਰਗੇ ਬਟਾਂਦਰ ਕਿੰਨੇ ਵਿਚਾਰ ਬਟੇ ਹੁੰਦੇ ਸਨ ਜਿਹੜੀ ਗੱਲ ਮੈਂ ਨਹੀਂ ਕਹਿ ਸਕਦਾ ਤੁਸੀਂ ਕਹਿ ਸਕਦੇ ਮੇਰਾ ਫਿਰ ਬੜੀ ਗੱਲ ਹੁੰਦਾ ਕਹਨਾ ਗਲਤ ਹੈ ਠੀਕ ਹੈ ਫਿਰ ਵੀ ਇਹ ਹੁੰਦੀ ਸੀ ਚਾਹੀਦਾ ਇਹਦੀ ਬਹੁਤ badi ਗੱਲ ਹੈ ਫਿਰ ਮੈਨੂੰ ਛੱਡ ਕੇ ਉਧਰ ਆ ਗਿਆ ਯਕੀਨ ਕਰੀਏ ਇਹ ਤਾਂ ਠੀਕ ਹੈ ਇਹ ਤਾਂ ਆਪਣੇ ਸਭਾਈ ਦੇਤੀ ਕਹਦਾ ਬੁੱਢੇ ਦੀ ਬਹੁਤ ਵੱਡੀ ਗੱਲ ਆ ਤੁਸੀਂ ਐਡੇ ਵੱਲੇ ਮਹਲਾ ਸਭੀ ਦਾ ਹੋ ਕੇ ਅਹ ਜਿਹੜੀ ਗੱਲਾਂ ਇਹਨੇ ਮੈਨੂੰ ਦਸੀਆਂ ਨੇ ਇਹ ਬੁੱਢੇ ਦੇ ਸਰਬ ਰਾਤ ਬਹੁਤ ਵੱਡੀ ਗੱਲ ਉਹ ਕਹੇ ਚਾਲ ਬਾੜੀ ਗੱਲ ਵੀ ਕੁਝ ਨਹੀਂ ਬਾੜੀ ਦਾ ਤੇਨੋਂ ਜ਼ਿਆਦਾ ਹੈ ਇਹ ਤੇ ਹੁੜਬੀ ਆਹੋ ਕੋਈ ਕੋਈ ਵਾੜਾ ਕਰਦਾ ਛੋੜਾ ਜਾਓ ਆਪਣੀ ਜਗ੍ਹਾ ਸੱਚੇ ਕਹਦਾ ਉਹ ਕਹੇ ਬਗਾ ਅਸਲ ਵਿੱਚ ਅਸੀਂ ਦੂਜੇ ਨੂੰ ਦੋਸਤ ਦਿਆ ਆਪਣੇ ਅੰਦਰ ਘਟ ਕੇ ਤੀਵਾਰ ਦੇ ਮੈਂ ਐਸਾ ਸਮਝਦਾ ਵੀ ਇਹ ਜਿਹੜੇ ਬੁੱਢੇ ਛੱਪਾ ਲਾ ਕੇ ਸਾਡੇ ਸਾਰੇ ਕੁਝ ਇਹਦੇ ਬੁੱਢੇ ਵੀ ਸਿਰ ਕੁੜੀ ਕਰਦੇ ਜਦੋਂ ਨਰਮੋਲੇ ਵੀ ਕੀ ਕਹਿੰਦੇ ਇਹ ਸਾਡੇ ਕਿਰਪਾ ਨਾਲ ਆਇਆ ਇਹ ਬਗਾਵਤ ਹੈ ਨਾ ਬੁੱਢਿਆਂ ਦੀ ਮੈਂ ਐਸਾ ਸਮਝਦਾ ਤਦ ਕਰੋ ਪਿਆਰੀਆਂ ਨਾਲ ਸਾਡਾ ਅਚਰਣ ਸਿੱਖੀ ਵਾਲਾ ਨਹੀਂ ਸਾਨੂੰ ਦੇ ਕੇ ਕਹਿੰਦੇ ਵੀ ਇਹ ਜੀ ਸਿੱਖੀ ਨੂੰ ਅਸੀਂ ਐਵੇਂ ਚੱਲੀ। ਮੈਂ ਸਮਝਦਾ ਵੀ ਸ਼ਾਇਦ ਇਹ ਗੱਲ ਹੈ। ਅਸੀਂ ਆਪਣੇ ਆਪ ਸਿੱਖ ਬਣੀਏ। ਉਹ ਦਾ ਅਰਥ ਉਹ ਗਰ ਤੇ ਰਣ ਕਹੀਏ ਲੜੀਏ। ਮੈਂ ਇਸ ਵੀ ਉਦਾਰ ਦੀ। ਮੇਰੀ ਪਰਸਨਲ رائے ਹੈ। ਇਹ ਗੁਰਬਾਣੀ ਗੱਲ ਵੀ ਹੈ ਸਾਨੂੰ ਉਪਦੇਸ਼ ਵੀ ਇਹੀ ਹੈ। ਕਦਾਬਾ ਜੇ ਕੋ ਮਾਰਦੇ ਤੁਸੀਂ ਹੋਰ ਰੋਵਾਇ। ਬਿੱਤੂ ਦਾ ਸੇਕਾ ਸੱਚ ਆ ਝੂਠ ਹੈ ਕਹਦਾ ਬਸ ਹੋਰ ਲੋਬਾਰੇ ਇਹ ਦੁਨੀਆ ਗੁਰੂ ਮੈਂ ਸਮਝ ਨਹੀਂ ਗਿਆ ਕਿ ਜ਼ੁਰਤ ਤਾਂ ਸਾਡਾ ਹੈ ਬਿੱਤੂ ਸਹੀ ਹੈ ਤਾਂ ਸਾਡਾ ਅਸੀਂ ਛੋਪੀ ਇਹਨੇ ਲੋਕਾਂ ਤੇ ਤੁਸੀਂ ਪਾਈ ਆਪਣੇ ਦਰ ਚਾਕੂ ਅਸੀਂ ਆਪਣੇ ਉੱਤੇ ਨਹੀਂ ਚਾਕਦੇ ਪਾਲਸ ਕੋਲ 13 ਤੇ 15 ਕਹਿੰਦੇ ਉਹ ਵੀ ਹਾਈਟ ਟਾਈਮ ਵੀ ਹੋਏ ਹੁਣ ਸਹੀ ਰੋੜਾ ਹੈ ਉਹਦਾ ਰੋੜਾ ਹੈ ਕਬੀਰ ਦਾ ਨੋ ਸੁਣ ਕੇ ਸਾਰੀ ਕਾਸ਼ੀ ਤੋਹਾ ਤੋਹਾ ਕਰਦੀ ਹੈ ਹੁਣ ਵੀ ਕਿਉਂ ਘਟੇ ਕਰਦੀ ਕੱਲ੍ਹ ਹੀ ਦੀ ਹੋਵੇ ਸਹੀ ਕਹਦੇ ਹੋਵੇ ਇੱਕ ਪਰ ਹੋਵੇ ਦੇ ਤੂੰ ਬਸ ਤੇ ਤਾਂ ਹੋਵੇ ਕੋ ਬਹੁਤ ਆ ਨਾ ਜਾਣਦੀ ਹੈ ਦੁਨੀਆ ਟੋੜੇ ਨੌ ਗੁਰੂਆਂ ਦਾ ਕੋਈ ਵੀ ਦੋ ਜਾਣਦਾ ਹੋਰ ਜਾਣਦਾ ਗੁਰੂ ਗ੍ਰੰਥ ਸਾਹਿਬ ਦਾ ਨਾਮ ਜਾਣਦਾ ਉਹਦਾ ਆਰਡਰ ਉਹ ਚੱਲਦਾ ਹੈ ਚੱਲਦਾ ਨਾ ਨੋ ਬਾਕੀਆਂ ਦਾ ਨੋ ਨਾਨਕੇ ਚੱਲਦਾ ਸਾਰੇ ਉਹਦਾ ਸਿੱਖੀ ਨੂੰ ਫਰਵਣ ਵਾਸਤੇ ਬਹੁਤ ਥੋੜੇ ਆਦਮੀ ਦੀ ਲੋੜ ਹੈ ਪਰ ਉਹ ਸਿੱਖ ਬਣ ਜਾਂਦੇ ਸਾਰੇ ਦੁਰੀਏ ਵੱਡਦੀ ਹੁੰਦੀ। ਹੋਰਾਂ ਨੂੰ ਪਲਟ ਡਿਊਟੀ ਚ ਲੱਗਦਾ। ਦੇਖੋ ਅਗਸਤਾਨੀ ਸਾਰਿਆਂ ਦੀ ਪਰਮ ਗਿਆਨ ਨਹੀਂ ਪੜਦੀ ਹੁੰਦੀ। ਗੁਰੂ ਦਾ ਬੜੇ ਵੀ ਨਹੀਂ ਪੜੀ। ਉਹ ਤਾਂ ਬੜੂਗੀ ਜਿਹੜੇ ਡੇਰੇ ਦੇ ਉਰਦਿਓ। ਪਰ ਕਾਜ ਖਾਬ ਪ੍ਰਚਾਰ ਵਾਲਾ ਜਿਹੜਾ ਉਹਦਾ ਵਿਸ਼ਵਾਸ ਹੈ। ਉਹ ਜਿਹੜਾ ਪਰਮ ਗਿਆਨ ਦੇ ਚੱਕਰ ਚ ਆਏ ਹੋਏ ਨੇ। ਬਾਕੀ ਬੰਤਾ ਦੇ ਚੱਕਰ ਚ ਉਲਕੜ ਜਾਂਦੇ। ਚੱਕਰ ਜੋ ਬਾਹਰ ਕੱਢਣਾ ਹੈ ਜੀ ਚੱਕਰ ਜੋ ਬਾਹਰ ਕੱਢਣਾ ਹੈ ਪਹਿਲੀ ਸਟੇਜ ਹੈ ਸਾਡੀ ਸਕੂਲੋਂ ਲੱਗ ਜਾਣਾ ਬਾਣੀ ਸੁਣਨ ਲੱਗ ਜਾਣਾ ਕੋ ਸਾਧਨ ਤੇ ਛੱਡ ਜਾਣਾ ਬਸ ਥੋੜੀ ਥੋੜੀ ਬਹੁਤ ਜਲਦੀ